ਪਰਮ ਸਨਮਾਨਯੋਗ ਸਾਧ ਸੰਗਤ ਜੀਓ ਰਸਨਾਤ ਮੇਤਰ ਕਰਮਾ ਹਾਸਤੇ ਆਖੋ ਤੁਹਾਨੂੰ ਸ੍ਰੀ ਸਤਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਆਪ ਜੀ ਨੇ ਖੋਣੇ-ਖੋਣੇ ਇਤਿਹਾਸ ਸਰਵਣ ਕੀਤਾ ਅੱਜ ਦਾ ਸਾਡਾ ਜੋ ਆ ਕਿਲ ਹੈ ਮੇਲਾ ਮਨਾਇਆ ਜਾ ਰਿਹਾ ਹੈ ਇਹ ਇਕਤਰਤਾ ਜੋ ਹੋਈ ਹੈ ਇਸ ਵਾਸਤੇ ਹੈ ਕਿ ਸਾਡੇ ਵਿੱਚੋਂ ਮਹਾਨ ਹਸਤੀ ਸਤਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਦੇ ਨਿਵਾਜੇ ਹੋਏ ਹਰ ਮਨ ਪਿਆਰੇ ਸ਼੍ਰੀਮਾਨ ਸੰਤ ਖਜਾਨ ਸਿੰਘ ਜੀ ਰਾਗੀ ਸਾਡੇ ਵਿੱਚੋਂ ਸਰੀਰ ਕਰਕੇ ਵਿਛੜ ਗਏ। ਦੂਸਰੀ ਹਸਤੀ ਨੇ ਸੰਤ ਬਲਵੰਤ ਸਿੰਘ ਜੀ ਪਟਨੇ ਵਾਲੇ ਜਿਨ੍ਹਾਂ ਨੇ ਆਪਣਾ ਜੀਵਨ ਬਤੀਤ ਕੀਤਾ ਗੁਰਮਖੀ ਤਰੀਕੇ ਨਾਲ ਬੜਾ ਉਤਸ਼ਾਹ ਉਹ ਵੇਖਿਆ ਮੈਂ ਪਟਨੇ ਦੀ ਸੰਗਤ ਵਿੱਚ ਇੱਕ ਵਾਰੀ ਇਹਦਾ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹੀ ਦੇ ਹੁਕਮ ਅਨਸਾਰ ਮੈਂ ਵੀ ਇੱਕ ਵਾਰੀ ਗਿਆ ਪਟਨੇ ਆਸ਼ਾ ਦੀ ਵਾਰ ਲਾਉਣ ਵਾਸਤੇ ਹੁਕਮ ਹੋਇਆ ਅਸੀਂ ਚਾਰ ਸਰੀਰ ਗਏ ਸੱਚੇ ਪਾਤਸ਼ਾਹ ਉੱਥੋਂ ਅੱਗੇ ਅਰੰਚੀ ਜਾਣਾ ਸੀ ਤੇ ਹੁਕਮ ਕੀਤਾ ਪੀਏ ਇਹਨਾਂ ਨੂੰ ਅਸਥਾਨ ਧਰਮ ਸਥਾਨ ਸਾਰੇ ਵਖਾੜ ਕੇ ਦੇ ਵਾਪਸ ਗੱਡੀ ਚੜਾ ਦਿਓ ਸਾਧ ਸੰਗਤ ਜੀ ਉਹਨਾਂ ਨੇ ਸਾਨੂੰ ਨਾਲ ਲੈ ਕੇ ਸਾਰੇ ਜਿਨੇ ਧਰਮ ਸਥਾਨਾਂ ਸਨ ਦਰਸ਼ਨ ਕਰਵਾਇਆ ਬੜੇ ਪ੍ਰੇਮ ਦਾਲ ਬਹੁਤ ਪ੍ਰੇਮ ਸੀ ਇਹਨਾਂ ਮਹਾਪੁਰਸ਼ਾਂ ਵਿੱਚ ਗੁਰੂ ਚਰਨਾਂ ਦਾ ਇਹ ਦੋ ਹਸਤੀਆਂ ਦੇ ਨਿਮਿਤ ਅੱਜ ਸਤਗੁਰਾਂ ਦੀ ਹਜ਼ੂਰੀ ਵਿੱਚ ਭੋਗ ਪੈਣਾ ਇਸ ਵਾਸਤੇ ਅਸੀਂ ਇਕੱਤਰ ਹੋਏ ਆਂ ਤੋਂ ਮੈਂ ਕਈ ਵਾਰੀ ਅਰਜ਼ ਕਰਨਾ ਹੁੰਦਾ ਕਿ ਸੰਸਾਰ ਵਿੱਚ ਆਉਣਾ ਤੇ ਜਾਣਾ ਇਹ ਮਨੁੱਖ ਦੇ ਹੱਥ ਵਿੱਚ ਨਹੀਂ ਦਿੱਤਾ ਗਿਆ ਸਾਰੇ ਇਸ਼ਤਿਹਾਰ ਨਹੀਂ ਦਿੱਤੇ ਗਏ ਦੁਨੀਆ ਦੇ ਉੱਤੇ ਜਨਮ ਲੈਣਾ ਤੇ ਇੱਥੋਂ ਚਲੇ ਜਾਣਾ ਜੀਵਨ ਸਮਾਪਤ ਕਰਕੇ ਕੋਈ ਹੋਰ ਸ਼ਕਤੀ ਹੈ ਜਿਹੜੀ ਕੰਮ ਕਰਦੀ ਪਈ ਹੈ ਮਨੁੱਖ ਨੇ ਆਪਣੀ ਕੋਈ ਵਿਚਾਰ ਨਹੀਂ ਬਣਦੀ ਕਿ ਮੈਂ ਸੰਸਾਰ ਤੇ ਜਾਵਾਂ ਕੋਈ ਨਹੀਂ ਕਹਿ ਸਕਦਾ ਕਿ ਮੈਂ ਆਪਣੀ ਮਰਜ਼ੀ ਨਾਲ ਦੁਨੀਆ ਵਿੱਚ ਆਇਆ ਕਿਸੇ ਦਾ ਭੇਜਿਆ ਹੋਇਆ ਆਇਆ ਹਮੇਸ਼ਾ ਤੁਸੀਂ ਸਰਵਣ ਕਰਦੇ ਹੋ ਕੱਲੇ ਆਵੇ ਨਾਨਕਾ ਸੱਦੇ ਉੱਠੀ ਜਾਏ ਭੇਜੇ ਸੀ ਤੇ ਆ ਗਏ ਸੜ ਸੱਦੇ ਤੇ ਚਲੇ ਗਏ ਗੁਰਬਾਣੀ ਇਸ ਪੱਖ ਨੂੰ ਮੰਨਦੀ ਹੈ ਜਿੰਨੂੰ ਲੋਕੀ ਮਰਨਾ ਤੇ ਮੌਤ ਕਹਿੰਦੇ ਸਭ ਸਾਡੇ ਗੁਰੂ ਸਾਹਿਬਾਂ ਨੇ ਉਹਦਾ ਨਾਮ ਬਦਲ ਕੇ ਰੱਖ ਦਿੱਤਾ ਪਾਤਸ਼ਾਹ ਕਹਿੰਦੇ ਨੇ ਇਹ ਮਰਨਾ ਹੀ ਨਹੀਂ ਆਖੋ ਇਹ ਮਰਨਾ ਨਹੀਂ ਮਰਦਾ ਉਹਨਾਂ ਨੇ ਨਾਮ ਬਦਲ ਦਿੱਤਾ ਕਿਉਂਕਿ ਮਰਨੇ ਕੋਲ ਦੋਖੀ ਕੁਛ ਦਰਦੇ ਸਨ ਤੇ ਜਿਹਦੇ ਕੋਲ ਡਰ ਲੱਗਦਾ ਤਾਂ ਉਹਨੂੰ ਪਰਮਾਨ ਕਰ ਲਿਆ ਜਾਏ ਉਹਦਾ ਨਾਮ ਹੀ ਬਦਲ ਦਿੱਤਾ ਜਾਏ ਉਹਦਾ ਨਿਸ਼ਾਨ ਮਿਟਾ ਦਿੱਤਾ ਜਾਏ ਤੇ ਉਹਦਾ ਡਰ ਮੁੱਕ ਜਾਂਦਾ ਸਤਗੁਰਾਂ ਨੇ ਇਹਦਾ ਨਾਮ ਰੱਖ ਦਿੱਤਾ ਹੁਕਮ ਗੁਰੂ ਨਾਨਕ ਦੇਵ ਜੀ ਕਹਿੰਦੇ ਨੇ ਕਹਿੰਦੇ ਨੇ ਜੰਮਣ ਮਰਨਾ ਹੁਕਮ ਹੈ ਪਾੜ ਆਵੇ ਜਾਏ ਇਹ ਹੁਕਮ ਕਹਿ ਦਿੱਤਾ ਪਰ ਕਬੀਰ ਕਹਿੰਦੇ ਨੇ ਮੈਂ ਜਿਹੜਾ ਮਰਨ ਸ਼ਬਦ ਹੈ ਏ ਉਹਨਾਂ ਦੇ ਉੱਤੇ ਲਾਗੂ ਹੁੰਦਾ ਜਿਨ੍ਹਾਂ ਨੂੰ ਰਾਮ ਦੀ ਲਖਤਾ ਨਹੀਂ ਹੋਈ ਜਿਨ੍ਹਾਂ ਨੂੰ ਗੁਰੂ ਦੀ ਲਖਤਾ ਨਹੀਂ ਹੋਈ ਜਿਨ੍ਹਾਂ ਨੂੰ ਨਾਮ ਜਪਣ ਦਾ ਪਤਾ ਹੀ ਨਹੀਂ ਜਿਨ੍ਹਾਂ ਦਾ ਜੀਵਨ ਸਤ ਸੰਗੀ ਨਹੀਂ ਕੀੜੀਆਂ ਆਵਾਜ਼ ਦੁਨੀਆ ਤੁਰੇ ਫਿਰਦੀ ਐ ਤੇ ਉਹ ਸੰਸਾਰ ਤੋਂ ਮਰਗੀ ਤੇ ਜੰਮਦੀ ਰਹਿੰਦੀ ਐ ਪਰ ਜਿਨ੍ਹਾਂ ਨੇ ਗੁਰਮਖੀ ਤਰੀਕੇ ਨਾਲ ਜੀਵਨ ਬਤੀਤ ਕੀਤਾ ਹੈ ਕਿ ਗੁਰੂ ਘਰ ਨਾਲ ਜੁੜ ਕੇ ਤੇ ਗੁਰੂ ਚਰਨਾਂ ਨਾਲ ਜੁੜ ਕੇ ਜੀਵਨ ਬਤੀਤ ਕੀਤਾ ਹੈ ਗੁਰਬਾਣੀ ਉਹਨਾਂ ਦੇ ਉੱਤੇ ਮਰਨਾ ਸ਼ਬਦ ਵਰਤਿਆ ਨਹੀਂ ਗੁਰਬਾਣੀ ਵਿੱਚ ਕਹਿੰਦੇ ਨੇ ਮਰੇ ਨਹੀਂ ਕੌਣ ਮਰਦਾ ਉਹ ਮਰਦੇ ਨੇ ਜਿਨ੍ਹਾਂ ਨੇ ਆਮ ਦੀ ਲਖਸ਼ਤਾ ਨਹੀਂ ਹੋਈ ਕਬੀਰ ਕਹਿੰਦੇ ਹਮ ਕੈਸੇ ਮਰੋ ਮਰਨ ਮੰਨ ਮੰਨਿਆ ਜਿਸ ਕੋ ਜਿਸ ਸ਼ਕਤੀ ਕੋ ਡਰ ਲੱਗਦਾ ਹੋਵੇ ਇਹਨੂੰ ਪ੍ਰਵਾਨ ਕਰ ਲੋ ਭਈ ਇਹ ਤੇ ਹੈ ਹੀ ਕੁਛ ਨਹੀਂ ਜਿੰਨੂੰ ਲੋਕੀ ਮਰਨ ਕਹਿੰਦੇ ਨੇ ਇਹ ਅਸਲੀ ਮਰਨ ਹੈ ਹੀ ਨਹੀਂ ਇਹ ਇੱਕ ਤਬਦੀਲੀ ਦਾ ਨਾਮ ਹੈ ਇੱਕ ਪਰਿਵਰਤਨ ਦਾ ਨਾਮ ਹੈ ਤੇ ਸਿਰਫ ਸਰੀਰ ਬਦਲੇਗਾ ਦੀਵਾ ਬਦਲੇਗਾ ਹਮੇਸ਼ਾ ਬਦਲਦਾ ਆਇਆ ਤੋ ਪਾਤਸ਼ਾਹ ਮੈਂ ਅਰਜ ਕਰ ਰਿਹਾ ਸਤਿਗੁਰੂ ਨਾਨਕ ਦੇਵ ਜੀ ਦਾ ਇੱਕ ਕਥਨ ਹੈ ਪਾਠ ਤੁਸੀਂ ਪਾਠ ਕਰਦੇ ਹੋ ਪਾਤਸ਼ਾਹ ਕਹਿੰਦੇ ਨੇ ਨਾ ਉਹ ਮਰੇ ਨਾ ਠਾਗੇ ਜਾਹੇ ਜਿਨਕੇ ਰਾਮ ਵਸਿਆ ਬਨਵਾ ਹੈ ਜਿਨ੍ਹਾਂ ਦੇ ਹਿਰਦੇ ਵਿੱਚ ਰਾਮ ਵਸ ਗਿਆ ਉਹ ਨਹੀਂ ਮਰਦੇ ਤੇ ਮਰਦੇ ਉਹ ਦੇ ਜਿਨ੍ਹਾਂ ਦੇ ਨੂੰ ਰਾਮ ਦੀ ਲਖਤਾ ਹੀ ਨਹੀਂ ਹੋਈ ਜਾਣ ਨਹੀਂ ਸਕੇ ਕਬੀਰ ਕਹਿੰਦੇ ਹੁਣ ਮੈਂ ਮਰਨਾ ਨਹੀਂ ਅਬ ਕੈਸੇ ਮਰੋ ਹੁਣ ਮੈਂ ਕੀ ਮਰਨਾ ਹੈ ਕਿਉਂਕਿ ਮਰਨ ਨੂੰ ਪਛਾਣ ਲਿਆ ਮੈਂ ਮਰਨਾ ਜਾਣ ਲਿਆ ਕਿ ਮਰਨਾ ਹੈ ਕੀ ਹੈ ਉਹਨਾਂ ਨੇ ਆਪਣੇ ਸ਼ਬਦਾਂ ਵਿੱਚ ਆਖਿਆ ਮੈਂ ਨਾ ਮਰੋ ਮਰਬੋ ਸੰਸਾਰਾ ਕਿਉਂਕਿ ਅਬ ਮਿਲਿਆ ਹੈ ਜੀ ਆਮਿਹਾਰਾ ਜਿਹੜਾ ਮੁਰਦੇ ਜ਼ਿੰਦੇ ਕਰ ਦਿੰਦੇ ਨੇ ਉਹ ਜੇ ਮੇਰੀ ਮਜ਼ਾਕ ਹੋ ਗਿਆ ਸੰਗਤ ਹੋਈ ਹੈ ਇਸ ਵਾਸਤੇ ਜਦੋਂ ਮੈਨੂੰ ਮੁਰਦੇ ਜ਼ਿੰਦੇ ਕਰਨ ਵਾਲਾ ਮਿਲ ਪਿਆ ਤੇ ਹੁਣ ਮੈਂ ਕਿਵੇਂ ਬਰਾਂਗਾ ਤਾਂ ਦੇਸੀ ਕੇ ਮਰਦ ਨੂੰ ਪਰਵਾਨ ਕਰ ਲਿਆ ਤੇ ਗੁਰੂ ਕੀ ਸੰਗਤ ਹੋ ਗਈ ਜਦੋਂ ਸਤਗੁਰੂ ਨੂੰ ਮਿਲਿਆ ਫੇਰ ਇਸ ਗੱਲ ਦਾ ਪਤਾ ਲੱਗਾ ਕਿ ਇਹ ਮਰਨਾ ਨਹੀਂ ਇਹ ਇੱਕ ਪਰਿਵਰਤਨ ਹੈ ਇੱਕ ਤਬਦੀਲੀ ਹੈ ਹਰ ਮਨੁੱਖ ਜਿਹੜਾ ਹੈ ਉਹ ਤਬਦੀਲੀ ਚਾਹੁੰਦਾ ਤੇ ਇਹੋ ਹੀ ਮਰਜ਼ਾਦਾ ਅਕਾਲ ਪੁਰਖ ਦੀ ਹੈ ਅਸੀਂ ਭੋਜਨ ਛਕਣਾ ਹੋਵੇ ਤੇ ਰੋਜ਼ ਤੁਸੀਂ ਕਿਹੜਾ ਪ੍ਰਸ਼ਾਦ ਨਹੀਂ ਛਕ ਸਕਦੇ ਬੜਾ ਔਖਾ ਹੈ ਨਮਕੀਨ ਨੂੰ ਜੀ ਕਰੇਗਾ ਤੇ ਜਿੰਨ ਕਿਨ ਖਾਦਾ ਤੇ ਅਗਲੇ ਦਿਨ ਆਖੇਗਾ ਮਿੱਠੀ ਜੀ ਲੈ ਆਓ ਇੱਕੋ ਜਿਆ ਨਹੀਂ ਵਰਤਦਾ ਇਹ ਤਬਦੀਲੀ ਕਰਦਾ ਹੀ ਰਹਿੰਦਾ ਭੋਜਨ ਵਿੱਚ ਖਾਣ ਪੀਣ ਪਹਿਰਾਗ ਵਿੱਚ ਹਰ ਵਕਤ ਤਬਦੀਲੀ ਆ ਹਰ ਥਾਂ ਤੇ ਇਹ ਪਤੀਜ ਦਾ ਇੱਕ ਥਾਂ ਰਹਿ ਕੇ ਕਿਤੇ ਨੌਕਰੀ ਲੱਗੀ ਹੋਵੇ ਤੇ ਜੇ 10 ਸਾਲ 20 ਸਾਲ ਗੁਜ਼ਰ ਜਾਏ ਤੇ ਫਿਰ ਦਰਖਾਸਤਾਂ ਦਿੰਦਾ ਵੀ ਮੈਨੂੰ ਇੱਥੋਂ ਟ੍ਰਾਂਸਫਰ ਕਰ ਦਿਓ ਮੇਰੀ ਤਬਦੀਲੀ ਕਰ ਦਿਓ ਬਦਲਣਾ ਚਾਹਦਾ ਮੈਂ ਕਹਿਣਾ ਇੱਕੋ ਜਿਹਾ ਨਹੀਂ ਰਹਿ ਕੇ ਰਾਜੀ ਏ ਇਹੋ ਹੀ ਮਰਜ਼ਾਦਾ ਅਕਾਲ ਪੁਰਖ ਦੀ ਹੈ ਅਕਾਲ ਪੁਰਖ ਵੀ ਇਹਨੂੰ ਇੱਕ ਰੂਪ ਵਿੱਚ ਨਹੀਂ ਰਹਿਣ ਦਿੰਦਾ ਇਹਦੇ ਕਈ ਰੂਪ ਬਦਲ ਕੇ ਰੱਖ ਦਿੰਦਾ ਕਈ ਵਾਰ ਸੰਸਾਰ ਵਿੱਚ ਆਉਣਾ ਪਿਆ ਤੇ ਜਦੋਂ ਵੀ ਆਇਆ ਰੂਪ ਬਦਲ ਕੇ ਆਇਆ ਇੱਕ ਰੂਪ ਨਹੀਂ ਲੈ ਕੇ ਆਇਆ ਕਬੀਰ ਕਹਿੰਦੇ ਨੇ ਹੁਣ ਜਦੋਂ ਤਾਂ ਸਤਿਗੁਰੂ ਮਿਲੇ ਹੁਣ ਪਤਾ ਲੱਗ ਗਿਆ ਕਿ ਮੈਂ ਨਹੀਂ ਮਰਾਂਗਾ ਮੈਂ ਨਾ ਮਰੂ ਮਰਬੋ ਸੰਸਾਰਾ ਸੰਸਾਰ ਮਰਦਾ ਫਿਰ ਪਰ ਇਹਦਾ ਇਹੋ ਗੱਲ ਨਹੀਂ ਹੈ ਅਸਲੀ ਗੱਲ ਇਹ ਹੈ ਕਿ ਮਰਨਾ ਹੈ ਦੋ ਪ੍ਰਕਾਰ ਦਾ ਸਰੀਰ ਕਰਕੇ ਅਜ ਕਬੀਰ ਵੀ ਹੈ ਨਹੀਂ ਜੇ ਅਸੀਂ ਕਬੀਰ ਦਾ ਦਰਸ਼ਨ ਕਰਨਾ ਹੋਵੇ ਤੇ ਬਿਲਕੁਲ ਨਹੀਂ ਹੋ ਸਕਦਾ ਦਰਸ਼ਨ ਕਿੱਥੋਂ ਹੋਵੇਗਾ ਗੁਰਬਾਣੀ ਵਿੱਚੋਂ ਹੋਵੇਗਾ ਕਬੀਰ ਕਬੀਰ ਹੁੰਦੀ ਪਈ ਹੈ ਹਰ ਥਾਂ ਤੇ ਕਬੀਰ ਵਸਿਆ ਹੋਇਆ हिंदुस्तान दिया बहुत धर्म पुस्तक में कबीर दी कथा कुर्बानी में कबीर दी कथा नाम है नाम करके नहीं मरया क्योंकि दो प्रकार ਦਾ ਮਰਨਾ ਹੈ ਇੱਕ ਹੈ ਸਰੀਰ ਕਰਕੇ ਮਰਨਾ ਤੇ ਇੱਕ ਹੈ ਜ਼ਮੀਰ ਕਰਕੇ ਮਰਨਾ ਸਰੀਰ ਕਰਕੇ ਕੋਈ ਮਹਾਪੁਰਸ਼ ਸੰਸਾਰ ਤੇ ਅੱਜ ਤੱਕ ਨਹੀਂ ਰਿਆ ਕਿਤਨੇ ਕੁ ਮੁਫਲਸ ਹੋ ਗਏ ਕਿਤਨੇ ਤਵੰਗਰ ਹੋ ਗਏ ਖਾਕ મે ਜਬ ਰਲ ਗਏ ਦੋਨੋਂ ਬਰਾਬਰ ਹੋ ਗਏ ਬੜੇ ਬੜੇ ਤਾਕਤਵਰ ਸੰਸਾਰ ਵਿੱਚ ਆਏ ਬਲੀ ਪਿਰਥੀੰਗ ਮੰਨ ਤਾਤਾ ਮਹੀਪੰ ਜਿਨਾਂ ਰਥ ਚਕਰੰ ਕੀਏ ਸਤ ਦੀਪੰ ਭੁਜੰ ਭੀਮ ਪਰਥੰ ਜਗੰ ਜੀਤ ਡੰਡੈਨ ਤੇ ਮੈਂ ਅੰਤ ਕੇ ਕਾਲ ਖੰਡੈਨ ਜਿਨਾਂ ਦੀਪ ਦੀਪੰ ਦੁਹਾਈ ਫੇਰਾਈ ਪੁਜਾ ਡੰਡ ਦੇ ਛੋਣ ਛਤਰੰ ਛਣਾਈ ਕੀਏ ਜਗ ਕੋਟੰ ਲੀਤੇ ਵਹਿ ਵੀਰ ਬੰਕੇ ਬਲੀ ਕਾਲ ਜੀਤੇ जिने बादशाह ही करी कोर्ट जुगियं रसन आंग रसन पली पात पुग्यं वह अंत को पावन आगे पधारे गिरे दीन देखे हठी कार मारे किथे गए लियो बड़े-बड़े ताकतवर जड़े मौत तो नहीं सर मरदे अपनी मर्जी ला दुनिया तो जान वाले पर आज दर्शन कोई नहीं उन्हें ना कर सकदा रह नहीं शक के मैं अर्ज कर रिया साहेब कि कोई भी आ जाए शरीर करके नहीं देखा ਕਿੰਨੇ ਹੀ ਸਤੰਬਰ ਤੇ ਸਤੰਬਰ ਤੇ ਪੈਗੰਬਰ ਸੰਸਾਰ ਵਿੱਚ ਹੋਏ ਨੇ ਅੱਜ ਵੇਖਣ ਵਿੱਚ ਕੋਈ ਨਹੀਂ ਆ ਰਿਹਾ ਇਸ ਵਾਸਤੇ ਕਿ ਇਹ ਮਰਜ਼ਾਦਾ ਹੈ ਨਹੀਂ ਇੱਥੇ ਰਹਿਣ ਦੀ ਮਰਜ਼ਾਦਾ ਨਹੀਂ ਬਣੀ ਤਬਦੀਲ ਹੋਵੇਗਾ ਬਦਲੀ ਹੋਵੇਗੀ ਹਰ ਵਕਤ ਬਦਲ ਕੇ ਅੱਗੇ ਦੂਜੇ ਥਾਂ ਜਾਣਾ ਪਏਗਾ ਇਸ ਵਾਸਤੇ ਸੰਤ ਖਜਾਜ ਸਿੰਘ ਜੀ ਉਹ ਅੱਜ ਉਹਨਾਂ ਦਾ ਪਰਿਵਰਤਨ ਹੋਇਆ ਸ਼ਰੀਰ ਦਾ ਤਬਦੀਲੀ ਹੋਵੇਗੀ ਗਏ ਨਹੀਂ ਕਿਤੇ ਮਰਨਾ ਨਹੀਂ ਅਸੀਂ ਉਹਨਾਂ ਨੂੰ ਕਹਿ ਸਕਦੇ ਕਿਉਂਕਿ ਗੁਰਬਾਣੀ ਨਹੀਂ ਬਦਲੀ ਕਬੀਰ ਕਹਿੰਦੇ ਨੇ ਮੈਂ ਤਾਂ ਮਰਾਂ ਕਿਉਂਕਿ ਮੈਂ ਜਮੀਰ ਕਰਕੇ ਨਹੀਂ ਮਰਦਾ ਮੇਰਾ ਸਰੀਰ ਮਰੇਗਾ ਸਰੀਰ ਦਾ ਨਾਮ ਹੈ ਸੰਸਾਰੀ ਕਿਉਂਕਿ ਸੰਸਾਰ ਚੋਂ ਮਿਲਿਆ ਇੱਥੇ ਸੰਸਾਰ ਤੋਂ ਭਾਵ ਹੈ ਸਰੀਰ ਜੋ ਪਦਾਰਥ ਤੁਹਾਨੂੰ ਸਰੀਰ ਸੰਸਾਰ ਵਿੱਚੋਂ ਮਿਲਿਆ ਇਹ ਨਾਲ ਨਹੀਂ ਜਾ ਸਕਦਾ ਕਬੀਰ ਕਹਿੰਦੇ ਨੇ ਮੈਂ ਸਰੀਰ ਕਰਕੇ ਮਰਾਂਗਾ ਜਮੀਰ ਕਰਕੇ ਨਹੀਂ ਮਰਦਾ ਮੈਂ ਕਹਿੰਦਾ ਜਿੰਨਾ ਚਿਰ ਗੁਰਸਤਗੁਰੂ ਵਾਲੇ ਲੋਕ ਗੁਰਸਿੱਖ ਜਿਦਾ ਨਾਮ ਹੈ ਜਿੰਨਾ ਚਿਰ ਗੁਰੂ ਚਰਨਾ ਨਾਲ ਜੁੜਿਆ ਰਿਹਾ ਇਹ ਮਰਿਆ ਨਹੀਂ ਕਿਸੇ ਤੋਂ ਗੁਰਸਿੱਖ ਦੀ ਮੌਤ ਉਦੋਂ ਹੋਈ ਹੈ ਇਹ ਗੁਰੂ ਚਰਨਾ ਨਾਲੋਂ ਟੁੱਟ ਗਿਆ ਉੱਥੇ ਮਰਿਆ ਗੁਰੂ ਅਰਜਨ ਗੁਰੂ ਰਾਮਦਾਸ ਕਹਿੰਦੇ ਨੇ ਕਹਿੰਦੇ ਨੇ ਜੋ ਪ੍ਰਾਣੀ ਜਲਬੇਦ ਹੈ ਮਰਦਾ ਜੋ ਪ੍ਰਾਣੀ ਜਲਬੇਦ ਹੈ ਮਰਦਾ ਤੇ ਗੁਰਸਿੱਖ ਤੇ ਉਹ ਸਿੱਖ ਗੁਰਦੇ ਮਰ ਜਾਈ ਐਸਾ ਸ਼ਬਦ ਹੈ ਸ਼ਾਇਦ ਕੋ ਅੱਖਰ ਵੱਧ ਕੱਟ ਹੋਣਗੇ ਮੈਂ ਅਰਜ ਕਰ ਰਿਹਾ ਸਾਹਿਬ ਗੁਰੂ ਤੋਂ ਬਿਨਾ ਮੌਤ ਹੋਈ ਹੈ ਜਦੋਂ ਵੀ ਗੁਰੂ ਨਾਲੋਂ ਟੁੱਟਿਆ ਉੱਥੇ ਮਰਿਆ ਤੇ ਜੇ ਗੁਰੂ ਨਾਲੋਂ ਨਹੀਂ ਟੁੱਟਿਆ ਤੇ ਇਹ ਫੌਸੀ ਦੇ ਤਖਤੇ ਤੇ ਕੇ ਫੌਸੀ ਝੂਟਦਾ ਹੋਇਆ ਵੀ ਨਹੀਂ ਮਰਿਆ ਆ ਗਿਆਨੀ ਰਤਨ ਸਿੰਘ ਜੀ ਜਿਨ੍ਹਾਂ ਨੂੰ ਸੂਬਾ ਜੀ ਕਹਿੰਦੇ ਨੇ ਨਾਮਤਾਰੀ ਇਤਿਹਾਸ ਵਿੱਚ ਲੋਦੇ ਹਰੇ ਦੀ ਜੇਲ੍ਹ ਦੇ ਬਾਹਰ ਦੇ ਦਰ ਫਾਂਸੀ ਦੇਣ ਲੱਗਾ ਅੰਗਰੇਜ਼ ਜਿਸ ਉਹ ਸਾਹਮਣੇ ਆਏ ਫਾਂਸੀ ਦਾ ਰੱਸਾ ਗਰਦ ਵਿੱਚ ਪਾਉਣ ਲੱਗੇ ਤੇ ਅੰਗਰੇਜ਼ ਅਫਸਰ ਪਰ ਨਾ ਕਰ ਸਕੇ ਪਰ ਉਹ منہ ਕਰ ਲਿਆ ਤੇ ਸੂਬਾ ਗਿਆਨੀ ਰਤਨ ਸਿੰਘ ਜੀ ਕਹਿੰਦੇ ਨੇ ਉਹ ਬੱਲਿਆ ਪਰ ਉਹ منہ ਕਿਉਂ ਕਰ ਲਈ ਮੇਰੇ ਵੱਲ ਦੇਖ ਤੇ ਸਹੀ ਤੂੰ ਮੈਂ ਸਮਝ ਬੈਠਾ ਕਿ ਮੈਂ ਇਹਦਾ ਸਰੀਰ ਖਤਮ ਕਰਕੇ ਇਹਨੂੰ ਮਾਰ ਦੇਗਾ ਮੈਂ ਸਰੀਰ ਕਰਕੇ ਮਰਾਂਗਾ ਜ਼ਮੀਰ ਕਰਕੇ ਨਹੀਂ ਮਰਾਂਗਾ